50 ਨੰਬਰ 929 ਤੇ ਰਾਮਕਲੀ ਰਾਗ ਵਿੱਚ ਸਿਰਨਾਮਕ ਸਾਹਿਬ साहब ਇਹ ਬਾਣੀ ਦਰਜ ਹੈ ਜੀ ਰਾਮਕਲੀ ਮਹੱਲਾ ਪਹਿਲਾ ਦੱਖਣੀ ਓੰਕਾਰ ਇਕ ਓੰਕਾਰ ਸਤਿਗੁਰ ਪ੍ਰਸਾਦ ਤੇ ਇਹ ਤੁਸੀਂ ਦੱਸੋਗੇ ਕਿ ਦੱਖਣੀ ਅੱਖਰ ਕਿਉਂ ਲੱਗਿਆ ਹੈ ਕਿਹਾ ਰਾਗ ਦੇ ਨਾਲ ਸੰਬੰਧਿਤ ਹੈ ਕਿ ਦਖਣੀ ਜਿਹੜਾ ਅੱਖਰ ਲਿਖਿਆ ਓੰਕਾਰ ਤੋਂ ਪਹਿਲਾਂ ਉਹਦਾ ਕੋਈ ਹੋਰ ਭਾਵ ਹੈ ਜੀ ਇਹਦੇ ਨਾਲ ਦਾ ਰੰਗ ਕੱਲੀ ਵੇਲੇ ਲਿਖੀ ਰਾਗ ਦਾ ਜੀ ਜੀ ਰਾਗ ਦਾ ਪਹਿਲਾ ਲਿਖਤਾ ਓੰਕਾਰ ਲਈ ਹੂੰ ਹੂੰ ਤਾਂ ਕੰਤੇ ਇਸੇ ਜਿਹੜੇ ਵਿਚਾਰਵਾਰ ਨਸੀਦੋ ਉਹਨੇ ਓ ਤੋ ਓ ਕਾਰ ਬਣਾ ਲਿਆ ਪਹਿਲਾਂ ਉਹ ਕਹਿੰਦਾ ਸੀ ਓਮ ਸ਼ਬਦ ਪਹਿਲਾਂ ਓ ਹਾਂਜੀ ਜਿਹੜਾ ਕਿ ਹਿੰਦੂ ਗ੍ਰੰਥਾ ਚ ਲਿਖਿਆ ਹੋਇਆ ਆ ਉਹ ਨੂੰ ਦੂਈ ਓ ਕਾਰ ਬਣਦਾ ਉਹਨੂੰ ਅੱਛਾ ਜੀ ਜਦੋਂ ਕੁਝ ਕਰਦਾ ਹੈ ਫਿਰ ਓਕਾਰ ਹੈ ਅੱਛਾ ਜੀ ਓਮ ਜਦੋਂ ਓ ਉਹ ਇਕੱਲਾ ਹੀ ਕਰਦਾ ਨਹੀਂ ਹੈ ਤੇ ਕੋਣ ਹੈ ਨੇ ਉਹਨਾਂ ਦੇ ਨਾਲ ਦੋਇਓ ਬੋਣਗੇ ਤੇ ਉਹ ਵੀ ਆਊਗਾ ਓਕਾਰ ਵੀ ਆਊਗਾ ਅੱਛਾ ਜੀ ਉਹਨਾਂ ਦੇ ਨਾਲ ਓਕਾਰ ਸਰਗੋਲ ਹਾਂ ਹਾਂ ਹਾਇ ਹੋਊਗੀ ਓਕਾਰ ਦੀ ਜਦੋਂ ਇਹਦੀ ਵਡਿਆਈ ਹੋਊਗੀ ਓਕਾਰ ਦੀ ਵਡਿਆਈ ਹੋਊ ਉਹਦੀ ਵਡਿਆਈ ਨਹੀਂ ਹੋ ਸਕਦੀ ਠੀਕ ਹੈ ਜੀ ਤੂੰ ਤਾਂ ਵਹਿਾਰੇ ਵੜਿਆਈ ਕਰਨੀ ਉਹਦੇ ਕਰਮ ਦੀ ਤੇਰੇ ਜੋ ਕਰਮ ਕਰੂਗਾ ਉਹਦੀ ਵੜਿਆਈ ਹੈ ਜੋ ਬੋੜੋਂ ਨੇ ਫੁੱਟਨੀ ਵੜਿਆਈ ਹੈ ਹਾਂਜੀ ਜੇਰਗੋੜੀ ਵੜਿਆਈ 50 ਕਰਦੀ ਓਮਕਾਰ ਸਰਗੋਣ ਆਛਰੀ ਆਕਾਰ ਵਿੱਚ ਉਹ ਜਮਾ ਆਕਾਰ ਆਕਾਰ ਦਾ ਅਰਦਾਯੋ ਬੋਤਿਯਾ ਦੇ ਆਕਾਰ ਧਾਰਦੀ ਹੈ ਤਾਂ ਅਰਪ ਜੁਦੀ ਹੈ ਠੀਕ ਹੈ ਜੀ ਜਿਵੇਂ ਪਾਣੀ ਜਦ ਇਹਦਾ ਛੱਲਦਾ ਰੂਪ ਧਾਰਨ ਕਰਦਾ ਹੈ ਹਾਂ ਜੀ ਲਹਿਰ ਦਾ ਰੂਪ ਧਾਰਨ ਕਰਦਾ ਤਾਂ ਵਿੱਚ ਕੋਈ ਚਤਰ ਨਹੀਂ ਹੁੰਦੀ ਹੈ ਸਿਰੇ ਹੁੰਦੀ ਹੈ ਅੱਛਾ ਬਾਹਰ ਬਕਲੇ ਉਠਲ ਪੁਥਲ ਹੁੰਦੀ ਹੈ समुद्रा ਕਿਸ ਕੁਟ ਹੋਦਾ ਨਾ ਜਦੋਂ ਕੋਈ ਬਾਰ ਤੋਂ ਡਗੜ ਕੇ ਤੇ ਇਹ ਜਿਹੜਾ ਅੱਖਰ ਇਹਦਾ ਉਹ ਓੰਕਾਰ ਅੱਖਰ ਦੀ ਜਿਹੜੀ ਹੁੰਦਾ ਇਹ ਓੰਗ ਤੋਂ ਹੋਈ ਹੈ ਹਾਂਜੀ ਉਹ ਤੋਂ ਨਹੀਂ ਹੋਈ ਆ ਤਰਨ ਦੇ ਸਿਆ ਸਬਦ ਅੱਖਰ ਕੁਝ ਤਰਨ ਦੇ ਤੇ ਜਬ ਕਰਦਾ ਤਾਂ ਓਕਾਰ ਹੈ ਜਾਂ ਨਹੀਂ ਕਰਦਾ ਤਾਂ ਓ ਓ ਤੇ ਨਿਰਗੁਣ ਰੂਪ ਚ ਓਂਗਾ ਤੇ ਸਰਗੁਣ ਰੂਪ ਚ ਓਂਕਾਰ ਹੈ ਜੀ ਇਹ ਇਹ ਅਖਰੀ ਦਾ ਮਤਲਬ ਪਹਿਲਾਂ ਵਰਤਿਆ ਜਾਂਦਾ ਸੀਗਾ ਪਹਿਲਾਂ ਊਪ ਦੇ ਵਿੱਚ ਵਰਤਿਆ ਜਾਂਦਾ ਸੀ ਸਾਧਖੜੀ ਵਾਲੇ ਅੱਛਾ ਜੀ ਸੰਸਾਰ ਦੇ ਵਿੱਚ ਸੰਸਾਰ ਹੈ ਤਾਂ ਓਕਾਰ ਹੈ ਠੀਕ ਹੈ ਸੰਸਾਰ ਨਹੀਂ ਹੈ ਫਿਰ ਉਹ ਠੀਕ ਹੈ ਜੀ ਹਾਂਜੀ ਬਾਣੀ ਅੰਦਰ ਅੱਖਰ ਜੀ ਤਿੰਨ ਤਰ੍ਹਾਂ ਨਾਲ ਵਰਤਿਆ ਗਿਆ ਹੈ ਇੱਕ ਤਾਂ ਓਅੰਕਾਰ ਅੱਖਰ ਮੁਖਤਾ ਹੈ ਇੱਕ ਓਅੰਕਾਰ ਅੱਖਰ ਜੋ ਹੈ ਉਹ ਨਾਲ ਜਿਸ ਤਰ੍ਹਾਂ ਕਿ ਇਸ ਬਾਣੀ ਦਾ ਨਾਮ ਓਅੰਕਾਰ ਆ ਤੋਂ ਇਲਾਵਾ ਵੀ ਬਾਣੀ ਵਿੱਚ ਦੋ ਜਗ੍ਹਾ ਓੰਕਰ ਨਾਲ ਓਅੰਕਾਰ ਵਰਤਿਆ ਉਹਦਾ ਨੂਰ ਦੇ ਦੇ ਜਿੱਥੇ ਓਂਕੜਾ ਉਹਦਾ ਨੂਰ ਦੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਜੀ ਭਗਤ ਕਬੀਰ ਜੀ ਨੇ ਵਰਤਿਆ ਇਹ ਸ਼ਬਦ 340 ਪੰਨੇ ਤੇ ਗੌੜੀ ਪੂਰਵੀ ਭਗਤ ਕਬੀਰ ਜੀ ਓਂਕਾਰ ਆਦਮੈ ਜਾਨਣਾ ਲਿਖ ਅਰ ਮਿਟੇ ਤਾਹ ਨ ਮਾਨਣਾ ਦਗੜਾਂ ਕਾਲੂ ਆਦਮ ਦੇ ਅੱਛਾ ਜੀ ਉਹ ਕਹਾਜਾ ਹੈ ਕੁਝ ਮਾਝਾ ਵਾਲਿਆ ਅੱਛਾ ਜੀ ਆ ਜਿਹੜਾ ਆਪਾਂ ਲਿਖ ਦਿੰਦੇ ਨਾ ਦਾਗ ਦੇ ਤੇ ਹਾਂਜੀ ਇਹ ਕਿਸੇ ਹੋਰ ਪੱਥਰ ਤੇ ਸਲੇਟ ਤੇ ਧਕੀ ਤੇ ਉਹ ਲਿਖਿਆ ਆ ਬਿਟਾਇਆ ਵੀ ਜਾ ਸਕਦਾ ਹੈ ਜਿਹੜਾ ਉਹ ਨਹੀਂ ਉਹ ਹੁੰਦਾ ਉਹ ਆਪਾਂ ਨੂੰ ਓਂਕਾਰ ਲਿਉਦਾ ਲਿਖਿਆ ਹੋਇਆ ਓਂਕਾਰ ਲਿਉਦਾ ਅੱਛਾ ਇਸ ਘਰ ਦੇ ਜਿਹੜੇ ਅਖੰਡ ਨੇ ਹਾਂਜੀ ਮਰਬਾਨੀ ਦੇ ਓਕਾਰ ਲੀਓ ਜੀ ਕੋਈ ਗੁਰੂ ਖੋਜੇ ਅਰੇ ਕੈਮੇ ਪੇ ਚਾਹੀਦਾ ਇੱਥੇ ਜਿਹੜੇ ਗੁਰਬਾਨ ਨੇ ਅਖੰਡ ਨੇ ਗੁਰੂ ਗ੍ਰੰਥ ਸਾਹਿਬ ਜੀ ਦਰਜਲ ਦੀੜ ਵਿੱਚ ਇੱਕ ਰਣੂਰੂ ਨਹੀਂ ਗਿਆ ਕਦੇ ਵੀ ਅੱਛਾ ਜੀ ਇਹ ਬੋਲੇ ਤਾਂ ਬਾਣੀ ਬਾਣੀ ਹੈ ਬਾਣੀ ਜੜੀ ਹੈ ਨਹੀਂ ਕਾਨੂੰ ਦਾ ਵਿਚਾਰ ਅੱਖਰੱਖਣ ਦਾ ਵਿਚਾਰ ਠੀਕ ਅੱਖਰੀ ਬੋਲਣਾ ਅੱਖਰੀ ਲਿਖਣਾ ਬੋਲਣ ਨਾਲ ਗਈ ਉਹ ਬਣ ਠੀਕ ਹੈ ਐਫ ਆਰ ਵੀ ਜ਼ਿਕਰ ਨੇ ਸਰਦਤਾ ਜਾਣ ਨਹੀਂ ਕਿਤਾ ਪੇਸ ਖਤਮ ਨਹੀਂ ਕਰਦਾ ਇਧਰ ਤਾਂ ਇੰਨੀ ਤਾਂ ਲੋੜ ਇਹਦੀ ਪਈ ਅਦੀ ਅਗਲੇ ਇਸਤੇਮਾਲ ਕਰਦੀ ਫਿਰ ਅੱਖਰਾਂ ਸਿਰਸ ਜੋਗ ਬਗੋਂ ਅੱਖਰਾਂ ਦੇ ਜੁਬੇ ਨੇ ਸਜੋਗ ਦਾ ਵਕੀਲ ਜਿਵੇਂ ਅੱਖਰ ਬੁਲਾਉਣਗੇ ਉਵੇਂ ਬੋਲਣਗੇ ਆਪਾਂ ਪਹਿਲਾਂ ਪਰਮੇਸ਼ਰ ਬੁਲਾਉਂਦਾ ਤਾਂ ਹੁਣ ਅੱਖਰ ਬੁਲਾਉਂਦੇ ਅੱਖਰਾਂ ਨੇ ਬੁਲਾਏ ਬੋਲਾਂਗੇ ਹੁਣ ਤੁਸੀਂ ਜਪੜ ਦੇ ਇਸ ਕਰਕੇ ਬੋਤੀ ਪਰਮੇਸ਼ਰ ਦਾ ਥਾਨ ਅੱਖਰ ਪਰਮੇਸ਼ਰ ਦੀ ਜਗ੍ਹਾ ਆ ਗਏ ਜਿਵੇਂ ਕਹਿੰਦੇ ਉਹ ਵੀ ਬਰੂੜ ਕੇ ਤੋਦੂ ਉਹ ਜਿਵੇਂ ਲਿਖਿਆ ਹੋਇਆ ਸਾਨੂੰ ਇਹ ਜੇ ਮੈਂ ਬੋਲਣਾ ਪੈਦਿਆ ਸੋਧੂ ਠੀਕ ਹੈ ਜਿਹੜਾ ਇਸ ਤਰ੍ਹਾਂ ਇਹਦੇ ਪ੍ਰਥਾਈਕ ਹੋਰਸ਼ ਪੰਕਤੀਆਂ ਵੀ ਹੈ ਜੀ ਅੱਖਰ ਲਿਖੇ ਸਹੀ ਗਾਵਾਂ ਉਹ ਕੀ ਭਾਵ ਹੈ ਉਹ ਖਾਨੀ ਲਿਖੇ ਅਗਲੇ ਅਖਲੇ ਲਿਖੇ ਹੀ ਹੋਉਣੇ ਆਪ ਅੱਛਾ ਲਿਖੇ ਕੀ ਭਾਵ ਲਿਖੇ ਕਿੱਥੇ ਨੇ ਅੰਲੇਖੇ ਪੋਥੀ ਲਿਖੇ ਅੱਛਾ ਜੀ ਯਾ ਮੇਰੇ ਅੰਦਰ ਲਿਖਦਾ ਹੈ ਗਿੜਾ ਸਪਰਸ਼ ਦੇ ਕੇ ਹਾਂ ਹਾਂ ਜੋ ਅਖਾਂ ਲਿਖੇ ਫਿਰ ਅਖਲੀ ਹੋਥੇ ਅੱਛਾ ਜੀ ਉਥੇ ਅਖਾਰ ਆਊਗਾ ਮੇਰੇ ਹਿਰਦੇ ਚ ਅਖਾਰ ਜੋ ਆਪਣੇ ਦਿਲ ਨੂੰ ਲਿਖਦਾ ਹੈ 칼 칼ਬ ਨੂੰ ਕਮਾਤ ਨੂੰ ਲਿਖਦਾ ਹੈ ਮੈਂ ਉਹੀ ਬੋਲਦਾ ਹਾਂ ਜੋ ਬੋਲਦਾ ਹੈ ਅੱਛਾ ਹੋਰ ਬੰਦ ਨਹੀਂ ਮੈਨੂੰ ਸਪਰਸ਼ ਦਿੰਦਾ ਉਹਦੇ ਬੋਲਦਾ ਥੋੜੀ ਜਿਹੀ ਖੇੜ ਉੱਚੀ ਹੋ ਜੂਗੀ ਉਹਨੂੰ ਨਾਲ ਔਖਾ ਹੋ ਜਾਊਗਾ ਉਤਰੀ ਆਪਦੀ ਗੱਲ ਹੈ ਅੱਛਾ ਜੀ ਤੇ ਜਿਹੜਾ ਇੱਥੇ ਸ਼ਬਦ ਆਪਾਂ ਭਗਤ ਕਬੀਰ ਜੀ ਦਾ ਕਹਿ ਰਹੇ ਸੀ ਮਾਨਾ ਓੰਕਾਰ ਲਖੈ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ ਓੰਕਾਰ ਦਾ ਜਿਹੜਾ ਲੋਕ ਬਣਾ ਕੇ ਪੂਰੇ ਰੱਖ ਲੈ ਵੀ ਦਰਸ਼ਨ ਕਰੋ ਅੱਛਾ ਜੀ ਉਹ ਕਹਿੰਦਾ ਇਹ ਉਪਾਰ ਅੱਖਰ ਉਹਦਾ ਲਿਖਿਆ ਹੋਇਆ ਉਕਾਰ ਨਹੀਂ ਹੈ ਇਹਨੂੰ ਦੇਖੀ ਜਾਓ ਇਹਦੇ ਉੱਤੇ ਧਿਆਨ ਦਾ ਦਿਓ। ਉਹ ਕਾਲੂ ਜੇ ਕੋਈ ਦੇਖ ਲਵੇ ਉਹਦੇ ਵਿਚਾਲੇ ਪਰੇ ਦਾ ਪਰਦਾ ਫਿਰ ਆਈ ਦੀ ਸਕਦਾ। ਠੀਕ ਹੈ ਜੀ। ਉਹ ਕਾਲ ਦੇਖਣਾ ਉਹਦਾ ਉਕਾਰ ਸੁਧੜਦਾ ਵਿਸ਼ਾ ਵਿਚਾਰਨ ਦਾ ਅੱਖਾਂ ਨੂੰ ਦੇਖਣ ਦਾ ਵਿਸ਼ਾ ਦੀ। ਹਾਂ। ਠੀਕ। ਵਿਸ਼ਾ ਹੈ। ਅੱਖਾਂ ਦਾ ਵਿਸ਼ਾ ਦੀ ਬੁੱਧੀ ਦਾ ਵਿਸ਼ਾ ਹੈ। ਠੀਕ ਜੀ ਗੁਰੂ ਵੀ ਬੁੱਧੀ ਦਾ ਵਿਸ਼ਾ ਹੈ ਗਿਆਨ ਗੁਰੂ ਵੀ ਬੁੱਧੀ ਦਾ ਵਿਸ਼ਾ ਹੈ ਅੱਖਰ ਦਾ ਦਾ ਵਿਸ਼ਾ ਹੀ ਨਹੀਂ ਹੈ ਅੱਖਰ ਦਾ ਵਿਸ਼ਾ ਉਹਦੇ ਬੈਠੇ ਹਾਂ ਜੀ ਦਾ ਵਿਸ਼ਾ ਨਹੀਂ ਹੈ ਕੋਈ ਹਾਂ ਹਾਂ ਅੱਖਰ ਬਾਜੇ ਸੁਣ ਅੱਖਰ ਮੈਨੂੰ ਕਦੀ ਸੁਣਦਾ ਹਾਂ ਜੀ ਕਿੱਥੇ ਜਾਊ ਬਹੁਤ ਥੱਲੇ ਦੀ ਸਟੇਜ ਤੇ ਸਿਰਲਾਂ ਗੱਲਾਂ ਕਰ ਰਹੇ ਨੇ ਜਿਹੜੇ ਨੇ ਜਿਹੜੇ ਪ੍ਰਚਾਰ ਆਪਣੇ ਸਮਝਦਾਰੀ ਤੇ ਸਿੱਖੀ ਦਾ ਪ੍ਰਚਾਰ ਕਰਨੇ ਉਹਦਾ ਬਿਲਕੁਲ ਹੀ ਡੱਲ ਦਬਾ ਨੇ ਦੁਨੀਆਂ ਅੱਛਾ ਜੀ ਅੱਛਾ ਕਹਿਣ ਦਾ ਭਾਵ ਇਹ ਹੈ ਵੀ ਅੱਖਰ ਹੈ ਇਹ ਤਾਂ ਹੋ ਗਿਆ ਅੱਖਾਂ ਦਾ ਵਿਸ਼ਾ ਹੈ ਜੀ ਉਹ ਜਿਹੜਾ ਆਦ ਦੀ ਬਾਣੀ ਆ ਕਿਸੇ ਵੀ ਬਾਣੀ ਵਿੱਚ ਤਾਂ ਅੱਖਰ ਲਿਖੇ ਆ ਬੋਲੇ ਨਹੀਂ ਬੋਲੇ ਨਹੀਂ ਬਾਣੀ ਬਣਦੀ ਏ ਬੋਲੇ ਨਹੀਂ ਕੰਮ ਹਾਂਜੀ ਤਾਂ ਮਤਲਬ ਜਿਹੜਾ ਪ੍ਰਚਾਰ ਕਰ ਬੈਠੇ ਆ ਸ਼ਬਦ ਗੁਰੂ ਹੈ ਤੇ ਉਹ ਫਿਰ ਗੁਰਮਤਿ ਦੇ ਅਨੁਕੂਲ ਨਹੀਂ ਹੈ ਗੱਲਾਂ ਬਿਲਕੁਲ ਨਹੀਂ ਹੈ ਗੁਰਮਤਿ ਅੱਛਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਕਹਿਣਾ ਅਗੇ ਅੰਤ ਹੈ ਠੀਕ ਹੈ ਜੀ ਉਹ ਸ਼ਬਦ ਜਿਹਨੂੰ ਰਣਗ ਗੁਰੂ ਕਹਿੰਦਾ ਉਹ ਬਿਨਾ ਤਨੂ ਇਹਦੇ ਸਲੋੜ ਠੀਕ ਹੈ ਉਹਦਾ ਤਾਂ ਬਹੁਤ ਉਹ ਦੁਰਤੀ ਬਾਣੀ ਨੂੰ ਕਹਿ ਰਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਉਹ ਬਾਣੀ ਤੋਂ ਵੀ ਗੁਰੂ ਗਿਆ ਸ਼ਬਦ ਨੂੰ ਵੀ ਗੁਰੂ ਗਿਆ ਤੁਰਕੀ ਬਾਣੀ ਗੁਰੂ ਆ ਠੀਕ ਹੈ ਜੀ ਤੇ ਜਦੋਂ ਆਪਾਂ ਓੰਕਾਰ ਇਹ ਬਾਣੀ ਨੂੰ ਲਿਖਦੇ ਆ ਇਹ ਹਮੇਸ਼ਾ ਓੰਕਾਰ ਨਾਲ ਆਉਂਦਾ ਜਿਵੇਂ ਜਪ ਅੱਖਰ ਆਪਾਂ ਓੰਕਾਰ ਨਾਲ ਲਿਖਦੇ ਆ ਜਦੋਂ ਬਾਣੀ ਦਾ ਨਾਮ ਲਿਖਣਾ ਹਾਂ ਜੀ ਤੇ ਇੱਕ ਜਗ੍ਹਾ ਹੋਰ ਇਸੇ ਹੀ ਪਹਿਲੀ ਮੰਕਤੀ ਜੇ ਉਪੀਸ ਤੋਂ ਅੱਗੇ ਇੱਕ ਵਰਮਾ ਕੀ ਆ ਹੈ ਨਾ ਜੀ ਉਹ ਕਾਰਿਆ ਜਿਹਨੇ ਚਿਤ ਕੀਤਾ ਅੱਛਾ ਜੀ ਇਹ ਉਹ ਕਾਰਿਆ ਜਿਹਨੇ ਬੰਦੂ ਚਿਤ ਕੀਤਾ ਦੁੱਲ ਜਿੱਤਿਆ ਅੱਛਾ ਜੀ ਇਹ ਕਰ ਸਕਦਾ ਜੇ ਵਾਇਆ ਤੋਂ ਅੱਛਾ ਜੀ ਤੇ ਜਿੱਤਣ ਦਾ ਪਰ ਆ ਦੇ ਨੂੰ ਜਿਨੇ ਆਪਾਂ ਜਿਹੜੇ ਪਹਿਲਵਾਨ ਕੋਲਦੇ ਆ ਉਹ ਚਿੱਟ ਕਰਦੇ ਆ ਕਿ ਦੋਏ जी ਹਰਾਉਂਦੇ ਹਾਂ ਜੀ ਹਾਂ ਤੇ ਬਾਕੀ ਜਿੱਥੇ ਵੀ ਇਹ 10 ਜਗ੍ਹਾ ਅਖਰ ਹੋਰ ਆਇਆ ਜੀ ਬਾਣੀ ਵਿੱਚ ਇਹ ਹਮੇਸ਼ਾ ਹੀ ਸਿਹਾਰੀ ਨਾਲ ਆਇਆ ਜੀ ਉਹ ਦੁਆਰਾ ਓਮਕਾਰ ਦੁਆਰਾ ਆਇਆ ਹੈ ਨਾ ਆਪਾਂ ਹੁਣ ਅਰਥ ਬੋਧ ਸ਼ੁਰੂ ਕਰਦੇ ਹਾਂ ਜੀ ਆਪ ਜੋ ਖੋਜ ਹੈ ਆਪਣੀ ਉਹਦੇ ਹਿਸਾਬ ਨਾਲ ਜੋ ਗੁਰਮਤਿ ਅਨੁਕੂਲ ਅਰਥ ਬਣਦੇ ਇਸ ਬਾਣੀ ਦੇ ਆਪ ਹੁਣ ਸਾਨੂੰ ਆਪਾਂ ਨੂੰ ਸਮਝਾਉਣ ਦੀ ਉਪਰਾਲਾ ਹੈ ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਸੰਗਤ ਇਹ ਜਿਹੜੀ ਅਰਥ ਹੈ ਇਹ ਸੁਣ ਕੇ ਇਹਨਾਂ ਨੂੰ ਵਿਚਾਰਨ ਤੇ